ਵਿਥਿਆ ਸਰਵਣ ਪਰ ਨਿੰਦਾ ਸੁਣੇ ਵਿਥਿਆ ਸ਼ਰਵਣ ਪਰ ਨਿੰਦਾ ਸੁਣੇ ਰਾਜਾ ਪੂਰਾ ਨਾ ਸ਼ਰਵਣ ਸਰਵੰਤ ਪੂਰਾ ਰਾਜਾ ਜਾਈਦਾ ਸਰਵੰਤ ਹੋਊਗੀ ਵਿਥਿਆ ਸ਼ਰਵਣ ਪਰ ਨਿੰਦਾ ਸੁਣੇ ਵਿਥਿਆ ਸ਼ਰਵਣ ਪਰ ਨਿੰਦਾ ਸੁਣੇ ਜਿਹੜੇ ਸ਼ਰਵਣ ਨੇ ਸਾਡੇ ਅੱਦਲੇ ਕੰਨ ਉਹ ਵੀ ਬਰ ਬਿਠੇ ਨਹੀਂ ਆ ਜਪਨ ਦੇ ਉਸ ਤਾਂ ਵਿਚਿਆ ਉਹ ਵੀ ਦੇਹੀ ਵਿਚਾਂ ਮਤਰੀ ਹੋਈ ਆ ਬਾਹਰ ਦਾ ਵਿਚਿਆ ਕਹਿਤਾ ਮਾਇਆ ਭਾਇਆ ਵਿਚਿਆ ਕਹਿਤੀ ਅਸਲੀ ਨਹੀਂ ਵਿਚਿਆ ਕਬਲ ਵਿਚਿਆ ਨੂੰ ਜਿਹੜਾ ਆ ਲੱਗਿਆ ਹੋਇਆ ਨਾ ਇਹ ਸੋਲੂਸ਼ਨ ਦੋ ਉਹ ਸੋਲੂਸ਼ਨ ਜਿਹੜਾ ਹੈਗਾ ਤਾਂ ਜਿਬੜਦੀ ਆ ਰਵੜੂ ਰਵੜ ਆ ਸਿਮਝ ਕਰ ਚਲ ਪਰ ਇਹ ਸੁਣਦਾ ਉੱਚ ਸਕਾ ਬਲਦੇ ਆ ਸਰੂਦੋ ਏਡੀ ਏਡੀ ਕਾਜਲਾ ਪਾ ਦੂਜਾ ਸੁਭਸੇ ਬੜਾ ਰਹਿ ਗਿਆ ਖੁਸ਼ ਆ ਤੁੰਦੇ ਕੀ ਤੁੰਦੇ ਕੀ ਲੋਈ ਮੋਤੀ ਦੀ ਕਿਸੇ ਦੀ ਸਹੀ ਨਹੀਂ ਬਸ ਹੁੰਦਾ ਨਹੀਂ ਰਹਿ ਕੇ ਸਰੀਰ ਦੀ ਜੰਗੀ ਕੀ ਜਲਣ ਸੀ ਉਹ ਬਹੁਤ ਕੋਸਾ ਬਹੁਤ ਜਗਰ ਦੇ ਰਿਹਾ ਉਹ ਐਸ ਅਵੇ ਬਹੁਤ ਜਿਹੜੀ ਵਧੀਆ ਪਸੰਦ ਵਾਲੀ ਚੀਜ਼ ਜਿੰਦੀ ਖਾਣ ਨੂੰ ਆਪਾਂ ਸਭ ਤੋਂ ਚਾਤਾ ਕੁਕੀ ਲੰਗਾ ਝਾਂਦ ਜਿੰਨ ਤੁਹਾਨੂੰ ਲੱਗਦਾ ਹੈ ਜਾਂ ਦੇਰ ਨੂੰ ਵੀ ਲੱਗਦਾ ਉਹ ਤਰ੍ਹਾਂ ਮਾਣੂ ਸਭ ਤੋਂ ਚੰਗੀ ਖਾਣ ਵਾਲੀ ਚੀਜ਼ ਸ੍ਰੀਕ ਬੇਨੂ ਦੇ ਜੇ ਉਹ ਜਲਾਤਾਂ ਦੇ ਹੰਡੋ ਸਭ ਤੋਂ ਟੇਸੀ ਹੈ ਹੋਏ ਹੈ ਹੋ ਜਿਹਨੂੰ ਇਹ ਨਹੀਂ ਹੈ ਇਹ ਬੱਚਾ ਇਹ ਦਿਨ ਹਾਲ ਜਿਹਦਾ ਹੈ ਇਹ ਜਿਹੜੀ ਹੈ ਨਾ ਇਹਨੇ ਕਵੀ ਪੈਦਾ ਕਰਤੀ ਸਾਡੇ ਅੰਦਰ ਕਿਹਾ ਅਡਾ ਸੁਭਾਚ ਹੈ ਤੇ ਚੈਨੀ ਕਿਸੇ ਦੀ ਨਹੀਂ ਜਿੰਨੇ ਪੜੀ ਕਿਸੇ ਦੀ ਨਹੀਂ ਜਿਹੜੀ ਨਹੀਂ ਭੱਲੀਆ ਭੁਲੀਆ ਸੁਣਦੀ ਕੋਈ ਸੁਣਦੀ ਨਹੀਂ ਹੁੰਦੀ ਬਰਾਏ ਸੌਣ ਵਾਲੀ ਚੀਜ਼ੇ ਨਹੀਂ ਐਤੇ ਦੱਦਾ ਦਾ ਬੋਲ ਰਹਿਣੀ ਦੱਦਾ ਕਰਦੀ ਨਹੀਂ ਭੱਲੀ ਕਿਸੇ ਦੀ ਅਸੀਂ ਤਾਂ ਦੱਦਾ ਸੌਣ ਨਹੀਂ ਸਕਦੇ ਉਸ ਤੱਕ ਬਿੱਟਾ ਦੋਈ ਤੱਕ ਵੰਡਜੇ ਤੇ ਰਾਸੂਣ ਵੀ ਕਰਦੀਆਂ ਬਸ ਉਹਦੇ ਵੰਡਜੇ ਉਹਨਾਂ ਕਾੜੀਆਂ ਛੋਡੀਆਂ ਵਿੱਚ 2000 ਜਿਆਦਾ ਪੱਕਾ ਰਹਿਣੀ ਵਾਲਾ ਨਹੀਂ ਆਪਰੇ ਰੁਸਤ ਕੰਨ ਦੇਵਾ ਜੇ ਸਾਡੇ ਘਰ ਹੋ ਤਾਂ ਨਹੀਂ ਨੂੰ ਜਿਹੜਾ ਕਹਿੰਦਾ ਹੈ ਦੂਰ ਨੂੰ ਲੱਭੋਗੇ ਪਾਛੇ ਉਹ ਪਾਉਗੇ ਉਹ ਆਹਾਂ ਨੂੰ ਬੱਡੇ ਬਾਂਗੋ ਨਹੀਂ ਘਰ ਹੋਣਗੇ ਜਹੀ ਇਹਦੀ ਜਿਹੜਾ ਵਿਹੇਤੀ ਇਹ ਸਾਡੇ ਆਪਣੀ ਹੁੰਦੀ ਇਹਨਾਂ ਨੂੰ ਖਰੀ ਆਪਣੀ ਕਰਦਾ ਨਾ ਖਰੀ ਕਹਦਾ ਮੰਦਾ ਜਨ ਕੋ ਖਰੀ ਪਿਆਰੀ ਹਾਂ ਜੇ ਕੋਈ ਕਰਦਾ ਆਪਣੀ ਉਹ ਹਟਕ ਨਹੀਂ ਨਿੰਦੋਂ ਨਿੰਦੋਂ ਮੋਹੋਂ ਨਿੰਦੋਂ हां हां जन थोड़ी प्यारी ना ना क्या खरीन दे आ घर बहुत ज्यादा प्यारी ये वकई हो साडे बाकी मरगे भी वो कमी साडी ठीक ही दस रहे बाकी ये वो कमी गास रहे साडे बिदवा रे कपड़े तो काली का है ਪਰ ਉਹ ਵੀ ਸਾਹ ਨੂੰ ਤੇ ਨਜ਼ਰ ਲੱਗੀ ਉਹਨੂੰ ਲੱਗਦੀ ਕਹਿਣਾ ਦਿੰਦੇ ਸੱਚੀ ਨਹੀਂ ਦਿੰਦੇ ਨੂੰ ਜੋਰ ਕਰਨ ਦਿੰਦੇ ਸੱਚਾ ਸੱਚ ਕੋਲ ਗੁਰਬਾਣੀ ਦੇ ਨਹੀਂ ਤਾਂ ਗੁਰਬਾਣੀ ਸਭ ਤੋਂ ਜ਼ਿਆਦਾ ਦਿੱਜੇ ਗੁਰਬਾਣੀ ਕਰਦੀ ਹੈ ਜੀ ਜਿੱਥੇ ਆਲੀਏ ਜਿੱਥੇ ਅਗਰੇ ਦੇ ਜੋ ਗੰਢ 1.30 ਅਜਾੜਾ ਅੱਗੇ ਜਾਣੋ ਗੋੜਾ ਨੂੰ ਲੁਕੋ ਲੈ ਇਹ ਵੀ ਜੀ ਇਹ ਵੀ ਗੁਰੂ ਘਰ ਦੇਗਾ ਬੁਢਾ ਅਜਾੜਾ ਕੇ ਉਹ ਜਿੰਨਾ ਉਹ ਗੋੜਾ ਉਹ ਵੀ ਦੱਸ ਦੋ ਜੇ ਉਹ ਘਰੋਂ ਜਿੱਥੇ ਤੋਂ ਇਹ ਕਾਲ ਕਰ ਸਕੇ ਫੇਦੀ ਆਪ ਕੋ ਤੇ ਗੁੰਮ ਵੀ ਦਾਸ ਤਾਂ ਕੋ ਤੇ ਦਾ ਕੋਣ ਵੀ ਦਾਸ ਤਾਂ ਗੁੰਮ ਵੀ ਦਾਸ ਆਦਮੀ ਹੈ ਤਾਂ ਵਧੀਆ ਜੇ ਸ਼ਬਦ ਤੇ ਹੋਰ ਵਧੀਆ ਹੋ ਜੇ ਮੈਂ ਉਹ ਕੋਈ ਹੋਰ ਹੀ ਕਹਿਣਾ ਬਹੁਤ ਕੋਈ ਹੋਰ ਵਧੀਆ ਹੋ ਹੋਰ ਵਧੀਆ ਹੋ ਜੇ ਹੋਰ ਇੱਜ਼ਤ ਵਾਧੀ ਹੈ ਤਾ ਉਹ ਮਾੜੀ ਨਹੀਂ ਦੱਸਦੀ ਆਪਾਂ ਕੱਲ ਨੂੰ ਕਹਾਂਗੇ ਕੋ ਅਰੂੜੇ ਕਸਰਾ ਲੱਗੀਏ ਦੇਖ ਦੇਖ ਸਰਾ ਬੁਰੀ ਲੱਗਦੀ ਬੁਰੀ ਲੱਗੂ ਕਿ ਸੇ ਕਰ ਲੈ ਭਲੀ ਕਈ ਬੁਰੀ ਲਗੀ ਐਸੇ ਵੀ ਲੋਕ ਹੈ ਜਿਹਨੂੰ ਪਰਿਚੇ ਬੁਰੀ ਲੱਗਦੀ ਪਾ ਗਿਆਨ ਇਹਦਾ ਮਤਲਬ ਗਿਆਨ ਚਾਹੀਦਾ ਮਿੰਦਾ ਗੁੰਦਾ ਮੁੱਤਾਂ ਜਿੰਨੀ ਵੀ ਗਿਆਨ ਹੈ ਕੋਈ لوگ دی من دے پپڑا جننوں نہیں گیا پائی لوکس دسوں جاں کہاں آ گئی بس ہاں ہاں جاں مار دسو جے اسی لوکسوں دتا کہہ رہے جے روز جڑے پین سناکی لوگ ਕੋਈ ਦਿਸਿਆ ਥੋੜੀ ਗਿਆ ਪੱਲਾ ਫਟ ਗਿਆ ਕਿਤੇ ਫਸ ਕੇ ਕੋਈ ਦਿਸਿਆ ਥੋੜੀ ਹੈ ਮਨੇ ਨੁਕਸਾਨ ਦੰਦਾ ਕਹਿ ਲੱਗ ਗਿਆ ਸਪੋਜੀਟਸ ਹੀ ਹੋਣ ਦਾ ਬਾਈ ਸੀ ਉਹ ਕਹਿੰਦੇ ਸਾਡੇ ਜੇ ਨਾ ਪਹੁੰਚੇ ਨਾ ਬਾਈ ਕਹਿੰਦੀ ਹੈ ਨਾ ਹੋਰ ਇੱਥੇ ਨਾ ਨਹੀਂ ਹੋਇਆ ਹਾਂ ਮਤਲਬ ਇਹ ਸੁਪਾਹਾਂ ਦੇ ਸਦਾਰਾਂ ਕਹੋ ਥੋੜੀ ਆਇਆ ਨਾਲ ਵੀ ਕਰਦਾ ਮੇਰੇ ਤਾਂ ਦਾ ਰੂਹ ਦਾ ਕਲੂਤਾ 잡ਨਿਆ ਮੈਂ ਹੈਗਾ ਤੂੰ ਉਹ ਕਹਿੰਦੀ ਇਹਨੂੰ ਬਹੁਤ ਗੁੱਸਾ ਕਰਦੇ ਸਭ ਸਭ ਗੁੱਸਾ ਹਾਂ ਚੱਟਾ ਛੱਡਦੇ ਕਹਿੰਦੀ ਹੈਗਾ ਰੂਹ ਤੇ ਗੁਰੂ ਬੋਲਾਂ ਦੇ ਅਨੁਸਾਰ ਅਸੀਂ ਅਜੀ ਕਹਣਾ ਹੈ ਦੇਵਰ ਇਹ ਤਾਂ ਨਾ ਛੱਡਣ ਕਰ ਉਹ ਅਸੀਂ ਕਰਨੇ ਛੱਡ ਇਹ ਗੱਲ ਨਹੀਂ ਬਾਡੀ ਦਾ ਜਿਹੜੀ ਸਾਤ ਉਹ ਨੀਤੀਆਂ ਵੀ ਹੈ ਇੱਕ ਸਾਰਤਕ ਤੋਂ ਜਨਰਲ ਡਟਾ ਸਾਰੇ ਪ੍ਰੈਸਿਡੈਂਟ ਪ੍ਰਾਈਮ ਮਿਨਿਸਟਰ ਰਾਸ਼ਟਰਪਤੀ ਸਾਰੇ ਅਲਾਊਡ ਹੈ ਅਲਾਊਡ ਵੀ ਸਾਰਤਕ ਲੋਜਿਕ ਨਾ ਅਲਾਊਡ ਹੈ ਅਲਾਊਡ ਹੈ ਅਲਾਊਡ ਹੀ ਤਾਂ ਹਰ ਵੀ ਮੈਂ ਕਹਿਣਾ ਵੀ ਆ ਜਿਹੜਾ ਸਮਝੋ ਇਹ ਸਾਡੇ ਅੱਖਾਂ ਰਾਊਡ ਹੈ ਚਾਹੇ ਜਿਹੜੀ ਗੱਲ ਹੈ ਅਲਾਊਡ ਹੈ ਜਦੋਂ ਤੁਸੀਂ ਸ਼ਬਦ ਕਰ ਸਕਦੇ ਹੋ ਸੱਚ ਹੈ। ਇਹ ਆਊਗਾ। ਜੋ ਕਹਿ ਵੀ ਬੰਦੇ ਨੂੰ ਨਹੀਂ ਵਿਚੰਦਾ ਹੋ ਜਾਂਦੀ। ਜੇ ਉਹ ਕਹੇ ਤੂੰ ਹੋਗਾ ਫਿਰ ਹੋਗਾ। ਤੂੰ ਦਾ ਤੁਸੀਂ ਪ੍ਰੂਫ ਨਹੀਂ ਕਰ ਹੈ ਦੇਖਣ। ਫਿਰ ਕੋਈ ਆ ਜਿਹੜਾ ਮੈਂ ਆਪਾਂ ਗਰਿਆਈ ਦੂਜਾ ਵੀਚਾ ਤਾਂ ਤਾਂ ਗਰਿਆਈ ਕੋਈ। ਮੂਣਾ ਨੇ ਬੱਦੇ ਲਾ ਕੇ ਸਭ ਕੁਝ ਦੇਖ ਲਿਆ। ਸਾਡੇ ਦੇ ਕੇਸ ਬਣਦਾ ਹੀ ਨਹੀਂ ਉੱਥੇ ਉਹਨਾਂ ਨੂੰ ਮੈਂ ਦੱਸਿਆ ਸਭ ਕੁਝ ਉਹ ਕਿ ਪਰ ਤੋਂ ਉਹ ਨਾ ਪੜਾ ਲੈਂਦੇ ਸੇਵਰ ਕਮਿਸ਼ਨ ਵਾਲੇ ਇਹ ਲੱਗਿਆ ਹੋਇਆ ਜਿਹਨੇ ਸਾਰਾ ਕੇਸ ਦੇਖਿਆ ਆਪਰੇ ਰਿਪੋਰਟ ਦੇ ਦਿੱਤਾ ਸਭ ਸੁਣਿਆ ਭਾਈ ਜਦ ਵੀ ਦੱਬੀ ਬੈਠਾ ਉਹ ਇਹ ਕਹਿੰਦੀ ਨਹੀਂ ਕੋੜੇ ਹੈ ਭਾਈ ਦੌਰਾ ਨੇ ਆਉ ਨੂੰ ਕੁਝ ਵੀ ਨਹੀਂ ਕੀਤਾ ਪਿਆ ਬੱਦ ਨੀ ਬਗੈਰ ਕਿਤੇ ਗਰਾਊਂਡ ਤੋਂ ਕਿੰਨੇ ਕਮੈਂਟ ਕਰਨਾ ਵੈਸੇ ਆ ਗੱਲ ਕਰਾਉਣਾ ਉਹ ਜਵਾਬ ਦੇ ਦਰ ਲੋਕਾਂ ਫਿਰ ਇੱਕ ਬਿੱਟ ਕੋਈ ਅ ਕਾਲਾ ਆਪਣੇ ਸਿੱਖੀ ਦਾ ਖਰਾਬ ਕੀਤੀ ਸਿੱਖੀ ਦਾ ਖਰਾਬ ਫਿਰ ਇਹ ਗੱਲ ਲੇ ਜੀ ਸਵੇਰੇ ਤਾਂ ਆਪਣੇ ਫਰਾਂਸ ਤੋਂ ਸਿੱਖੇ ਜੀ ਆ ਫਿਰ ਮੈਂ ਕਿਹਾ ਅੱਜ ਵੀ ਆਪਣਾ ਘਰ ਸਾਫ ਕਰਨਾ ਹੈ ਅੱਜ ਗੰਦ ਪਾਇਆ ਇਹਨਾਂ ਨੇ ਸਾਡ ਕੋਈ ਆਪਣਾ ਘਰ ਸਾਫ ਕਰਤੇ ਨਹੀਂ ਤਾਂ ਸਾਫ ਕਰਦਾ ਲੋਕ ਜਿੰਦੇ ਵੀ ਆਪਣੇ ਹੀ ਕੀਤਾ ਸੀ ਪੱਤਾਂ ਨੇ ਆਪਣਾ ਹੀ ਘਰ ਸਾਫ ਕੀਤਾ ਆਪਣੇ ਧਰਮ ਤੇ ਕਮਿਟ ਕੀਤਾ ਜੀ ਜੀ ਗੱਲ ਕਰਦੇ ਯਾਦ ਕਰੇ ਉਹ ਸਾਰੇ ਕੋਲ ਬਲਿਦਦਾ ਵੀ ਸਰਕਾਰ ਨਾਲ ਕਰ ਮੈਂ ਤਾਂ ਸਰਕਾਰੇ ਤੋਂ ਅੱਖਰ ਦੇ ਲਈ ਲਾ ਸਕੀ ਸਿਰਫ ਬੋਲਣ ਦੇ ਕਮ ਆਨ ਆ ਗਿਆ ਆਪਣੇ ਸੋਨਾ ਆਇਆ ਗੱਟ ਕੇ ਪ੍ਰਚਾਰ ਕਰੀਏ ਜੇ ਸਰਕਾਰ ਬਹਿ ਨਹੀਂ ਲਾ ਸਕਦੀ ਦੇਰੇ ਤੇ ਪਰ ਹੈ ਸੱਚ ਤੇ ਅਸੀਂ ਡਰੀਏ ਕਿਉਂ ਕਿ ਤੇ ਜੇ ਕੋਈ ਹੋਰ ਬੋਲ ਇਹ ਬੋਲ ਭਾ ਸੁਪਰੀਮ ਕੋਰਟ ਕਰੇ ਹਮ ਲੋਗ ਬੋਲਣ ਦਾ ਬੰਦ ਨਾ ਹੋਵੇ ਸਾਡੇ ਉਹ ਹਰਗੇ ਸੰਧਰਾਂ ਕੇ ਬਣਾ ਕੇ ਡਾਕੂ ਦੇ ਲਾਣਾ ਚਾਹੀਦਾ ਸੀ ਜਿਹੜਾ ਜਿਹੇ ਪੁੱਛਾ ਕਹੀ ਹੈ। ਉੱਤੇ ਲਾਣਾ ਚਾਹੀਦਾ ਸੀ। ਨਹੀਂ ਆਪਣਾ ਆਪਣੇ ਨਾ। ਸੱਚਾਈ ਦਾ ਪ੍ਰਚਾਰ ਕਰ। ਉਹ ਕਿਉਂ ਨਹੀਂ ਕਰਦੇ? ਪ੍ਰਚਾਰ ਦਾ ਖੰਦੇ। ਚਲ ਪ੍ਰਚਾਰ ਕਰਦੇ ਨਹੀਂ। ਕੌਣ ਕੰਦਨ ਦਾ ਸੋਟ ਮਾਰੇ ਵੀ ਪੈਸੇ ਉਹੀ ਗੱਲ ਉਹ ਕੰਦਨ ਫੈਲੀ ਜਿਵੇਂ ਕੋਈ ਸੂਜਨਾ ਦਾ ਅਧਿਕਾਰਕ ਤੌਰ ਤੇ ਜਦੋਂ ਪੁਸ਼ਟੀ ਹੁੰਦੀ ਹੈ ਕਿਸੇ ਗੱਲ ਹਾਂ ਉਹਦੀ ਵੰਦੀ ਜਿਆਦਾ ਲੋਕ ਉਹਨੂੰ ਮੰਨਦੇ ਜਿੰਨਾ ਜਿੰਨਾ ਦਿਖਾਣ ਤੌਰ ਤੇ ਪੁਸ਼ਟੀ ਲੋਕ ਅਧਿਕਾਰਕ ਤੌਰ ਤੇ ਇਹ ਨਾ ਹੋਣ ਜੇ ਅਪਾ ਸਾਈਡ ਦੇ ਬਾਰੇ ਗੱਲ ਕਰਦਾ ਹੈ ਉਹ ਸੰਗਤ ਨੂੰ ਵੀ ਵੈਲੀਉ ਨਹੀਂ ਦਿੰਦੀ ਗੱਲ ਨੂੰ ਜਦੋਂ ਕੋਈ ਬੰਦਾ ਪਲੇਟਫਾਰਮ ਤੋਂ ਗੱਲ ਕਰਦਾ ਉਹਦੀ ਵੈਲੀਉ ਹੈ ਜਿਆਦਾ ਸੀ ਇਹਨਾਂ ਦਾ ਦਿੱਤਾ ਹੋਇਆ ਹੈ ਵਿੱਚ ਕਦੇ ਵੀ ਉਹ ਦੂਵੇ ਇਹਨਾਂ ਨੇ ਕਾਬਿਲ ਗੁਰਦਾਰਾ ਇੱਕ ਬਣਾ ਲਿਆ ਸੀ ਇਹ ਪ੍ਰਚਾਰ ਆ ਕਰਾਂ ਉਹ ਇਹ ਤੋਂ ਵੀ ਕਿ ਤੁਸੀਂ ਗੱਲ ਕਰਨੀ ਹੈ ਤੇ ਕੇ ਵੀ ਅਸੀਂ ਇਹ ਤਾਂ ਹੀ ਜਾਂਦਾ ਵੀ ਤੁਹਾਡੀ ਇੱਜ਼ਤ ਨਾਲ ਸਾਡੀ ਹੋਵੇ ਤੁਸੀਂ ਗੱਲ ਜਾਵੇ ਗੱਲ ਗੁੱਲ ਨਹੀਂ ਜਾਵੇ ਫਾਈਲਾਈਟ ਹੋਵੇ ਕੋਈ ਕਹ ਲਓ ਤੁਸੀਂ ਕਹ ਲਓ ਕੋਈ ਕਰ ਦੋ ਤੇ ਕੀ ਫਰਕ ਪੈਦਾ ਹੈ ਫਰਦ ਚੇਂਜ ਹੋਣਾ ਮਤਲਬ ਹੈ। ਨਹੀਂ। ਮਿੱਥਿਆ শ্রবণ ਉੱਪਰ ਨਿੰਦਾ ਸੁਣੇ, ਮਿੱਥਿਆ ਹਸਤ ਪਰ ਦਰਪ ਘੋਏ ਨੇ। ਦੇਖੋ, ਵਿੱਦਿਆ ਪਹਿਲਾਂ ਤਾਂ ਵਿੱਥਿਆ ਜਿਹੜੇ ਕੰਦਲ ਦੇ ਲੋ শ্রবণ ਦੇ ਸਾਡੀ। ਬਾਲਕਾਤੀ ਅਧਰਲੀ ਸ਼ਕਤੀ ਹੈ, ਸੋਣ ਸ਼ਕਤੀ ਹੈ। ਉਹ ਮਿੱਥਿਆ ਹੋ ਜਾਂਦੀ ਹੈ, ਉਹ ਨੂੰ ਜਾਂ ਦੋਹੀਆਂ ਸੂਤ ਲੱਗ ਜਾਂਦੀ। ਜਦਿਆਂ ਦੀ ਉਹ ਸੂਤ ਕੱ ਲੈਂਦਾ ਕੱਢੀ ਸੂਤ ਨੂੰ ਕੱਦ ਪੈ ਲਾਤ ਬਾੜੇ ਖੜੇ। ਜਦ ਸੂਤ ਕੱ ਲੈਂਦਾ ਮੇਰੇ ਗੱਲ ਇਹ ਬਣ ਜਾਂਦੀ ਹੈ ਜਿਹੜੀ ਗੱਲ ਕੰਦ ਜੰਪ ਹੋ ਗੁਰਬਾਣੀ ਸੁਣਦਾ ਰਹਿੰਦਾ ਇਤਬਾਰ ਕਰਦਾ ਜੀ ਇਹ ਹੰਸ ਰੂਪ ਆਦਮੀ ਫਿਰ ਜੰਪ ਕਰ ਕਿ ਆ ਜੁਮਾਰੀ ਰਚੇ ਆਫ ਦਾ ਐਮ ਦਾ ਕਰੋ ਹਾਜੀ ਮਿੱਥਿਆ শ্রবণ ਪਰਿੰਦਾ ਸੁਨੇ ਮਿੱਥਿਆ ਹਸਤ ਪਰ ਦਰਬ ਘੋਰੇ ਮਿੱਥਿਆ ਹਸਤ ਜਿਹੜਾ ਬਾਣਾ ਕੇ ਤਾਂ ਧੋਏ ਨਹੀਂ ਹੱਥ ਇਹ ਮਿੱਥਿਆ ਕਦੋਂਗੇ ਇਹਨਾਂ ਨੂੰ ਹੂਤ ਕੱਦ ਲੱਗਿਆ ਇਹ ਕਾਲੇ ਛੂ ਹੋਗੇ ਇਹਨਾਂ ਚ ਕਾਲਸ ਕਿੱਥੋਂ ਲੱਗਦੀ ਦੂਜੇ ਦਾ ਦਰਬ ਜਿਹੜਾ ਰੁਪਿਆ ਉਹ ਆਪਣੇ ਆਪਣੀਆਂ ਗੱਲ ਨਾਲ ਚਾਹੇ ਉਹ ਧਾਰਮਿਕ ਕੰਮ ਕਰੇ ਚਾਹੇ ਉਹ ਤੇਰੀ ਅੱਭੀਓ ਕਰੇ ਉਹਦੇ ਨਾਲ ਦੂਰੇ ਦਾ ਜਿਹੜਾ ਤਨ ਉਹ ਚਾਲ ਚਾਲੇ ਚਾਹੇ ਸੰਸਾਰੀ ਸ਼ਕਤੀ ਕਹ ਲੋ ਕਿਸੇ ਵੀ ਤਰੀਕੇ ਨਾਲ ਦੂਰੇ ਦਾ ਗਰਭ ਉਹ ਲੈਣ ਜਿਹੜੇ ਇੱਛਾ ਰੱਖਦੇ ਨੇ ਹਰ ਵਕਤ ਉਹ ਵੀ ਉਹ ਇਹਦੇ ਸਹੀ ਜਿਹੜੀ ਆ ਰੰਗ ਬਾਇਆ ਦਾ ਜਿਹੜਾ ਹੈ ਭੁੱਖ ਹੈ ਜਿਹੜੀ ਬਾਇਆ ਦੀ ਮਿਠਿਆ ਨੇਤਰ ਪੇਖਤ ਪਰ ਤ੍ਰਿਯਾ ਰੂਪ ਆ ਬਿਠਿਆ ਜੇਤਰ ਉਹ ਖਾਵੀ ਬਿਠਿਆ ਦੇਖ ਰਿਹਾ ਪਰ ਤ੍ਰਿਯਾ ਬਿਠਿਆ ਜਿਹੜੀ ਝੂਜੀ ਮੱਤ ਹੈ ਬੁੱਧ ਉਹਦੇ ਕੋਈ ਗੁੰਡ ਚੱਕਦੇ ਦੇਤੀ ਉਹਦਾ ਰੂਪ ਵਧੀਆ ਬੁੱਧੀ ਆਪਣਾ ਲਗਣਾ ਆਪਣੇ ਪਰਪਰ ਦਾ ਰੂਪ ਜੀ ਫਲsterya ਦੂਜੇ ਦੀ ਮਤ ਹੁੰਦੀ ਆ ਦੂਜੇ ਦੀ ਜਿਹੜੀ ਮਤ ਵਪੇਖ ਬੁੱਧੀ ਤੋਂ ਇਲਾਵਾ ਜਿਹੜੀ ਹੋਰ ਕੋਈ ਬੁੱਧ ਉਹਨਾਂ ਜਿਹੜੀ ਰੂਪ ਜੇ ਦੇਖੇ ਕੋਈ ਪ੍ਰਭਾਵਿਤ ਹੋਵੇ ਉਹ ਰੂਪ ਨੂੰ ਰੂਪ ਬਣੇ ਉਹ ਫਿਰ ਖਰਾਜ ਹੋ ਜਾਂਦਾ ਉਹ ਲੈਣਾ ਦੇ ਪਰਸੇਆਂ ਨੂੰ ਡੇਲਦਾ ਹੀ ਨਹੀਂ ਹੈ ਫਿਰ ਜੀ ਉਹ ਮਹੰਤਾਂ ਜੀ ਨੂੰ ਨਵੇਂ ਬੁੱਢੇ ਤੋਂ ਆਪ ਕੋ ਹੋ ਰਹੇ ਹਾਂ ਉਹਦਾ ਪਤਰੀਏ ਉਹੋ ਚ ਮਹੰਤਾਂ ਜੀ ਉਹ ਤਾਂ ਉਹ ਸਭ ਪਰਸੇ ਇੱਕ ਤੂੰ ਜੇ ਨਹੀਂ ਪਰਤਰੀ ਨਹੀਂ ਹੈ ਮਨ ਦੇ ਯਾਰ ਮੋਤ ਮਾਤੀ ਜਿਹੜੀ ਮੱਤਾ ਪਰਤਰੀ ਕਿ ਮਨਮਤ ਕੋਲ ਉਹ ਵਰਮਤ ਪਰਤਰੀ ਜਿੱਥੇ ਬਾਣ ਮੱਤਾ ਪਰਤਰੀ ਹੋ ਜੇ ਇੱਕ ਕੌਣ ਹੈ ਧੂਆ ਹੁੰਦਾ ਜਿਹੜੇ ਪਰ ਹੁੰਦਾ ਧੂਆ ਪਰ ਇੱਕ ਹੈ ਸਭ ਦੇ ਉੱਤੇ ਬਾਣ ਪਰ ਹੈ ਵਰਮੰਦੀ ਪਰਤਰੀ ਜਿਹੜੀ ਹੋਵੇ ਉਹ ਬਣ ਬੁੱਧ ਨੂੰ ਕੋਈ ਰੌਡ ਫੋਟਾਂ ਨਹੀਂ ਬੇ ਨਾ ਪਰਸ ਰਿਆ ਜਿਹੜੀ ਸਤ ਬੁੱਧ ਹੈ ਉਹ ਪਰਸ ਰਿਆ ਉਹ ਪਰਸ ਰਿਆ ਦੀ ਰੇਤੀ ਉਹ ਕਰਕੀਦਾਰ ਹੈ ਨਾ ਅੱਜ ਆ ਗਿਆ ਉਹ ਕਰਕੀਦਾਰ ਹੋੜੀ ਅਸਲਾਤ ਮੰਦੇ ਆਵਾਜ਼ ਆ ਕਰਕੀਦਾਰ ਆ ਆਹੋ ਆਇਓ ਸਾਹੇ ਤੇ ਲੱਗ ਕੇ ਤਣ ਲੈ ਕੇ ਫਟੌੜੀਆਂ ਲੱਗ ਰਹੇ ਮਾਰੇ ਖਲਾ ਦਾ ਦੇ ਗੁੱਸੇ ਨਾਲ ਨਹੀਂ ਨਹੀਂ ਉਹ ਉੱਧਰ ਉੱਧਰ ਲੱਗੂ ਨਹੀਂ ਹੁੰਦਾ ਇਹਦੇ ਤੇ ਪਰ ਉਹ ਤਾਂ ਚੱਲਦੀ ਆਈ ਐ ਫੇਰ ਤਰ ਤਰਿਆ ਨਾ ਦੇਖੇ ਉਧਰ ਸਹੀ ਦੇਖਦੇ ਸ਼੍ਰੀ ਮਾਤਾ ਛੱਡਾਂ ਗੱਲਾਂ ਛੱਡਾਂ ਉਹ ਵੀ ਦੇਖਦੇ ਜੇ ਦੂਜੀ ਵੀ ਦੇਖਦੇ ਕੋਈ ਨਾ ਕੰਪੈਰੀਸ਼ਨ ਕਰਦਾ ਇਹਨਾਂ ਪਹਿਲਾਂ ਹੀ ਕਰ ਲੋ ਜੇ ਸਤਿਗੁਰ ਸਲਾਮ ਆਉਂਦੀ ਐ ਲੈਣ ਦੀ ਪੈਜੀ ਢੋਹ ਦੋ ਜਾਨੀ ਇਹ ਤੇ ਦੋ ਗੱਲਾਂ ਚੰਗੀਆਂ ਨੇ ਹਾਂ ਦੋ ਗੱਲਾਂ ਚੰਗੀਆਂ ਨੇ ਸੀ ਮਿੱਥਿਆ ਨੇਤਰ ਪ੍ਰੇਖਿਤ ਪਰ ਤ੍ਰਿਆ ਰੂਪ ਆਦ ਮਿੱਥਿਆ ਰਸਨਾ ਭੋਜਨ ਅਨ ਸੁਭਾਵ ਜਿਹੜੇ ਹੁਣ ਬੰਦੇ ਸਾਡੇ ਦੂਜਾ ਜਿਹੜਾ ਅਸਰ ਕੇ ਲੈ ਪਰਮਾਨੰਚ ਮੈਂ ਗਾਲਦੇ ਅਸੀਂ ਉਹ ਅਸਰ ਉਹਦਾ ਰੂਪ ਇਹੋ ਪਰਦੇ ਆਦਾ ਪਿਆ ਆ ਇਹਦੇ ਤੇ ਸਾਡੇ ਤੇ ਪੈ ਰਿਆ ਚਾਹ ਨਾਮ ਆਵਦਾ ਕਾਂਸੀ ਦਾ ਆਵਰਦੇ ਨੇ ਉਹ ਤੇ ਕੀ ਰੂਪ ਕਰੈ ਕੀ ਉਹ ਤੇ ਹੈ ਉਹ ਜਿਹੜਾ ਰੂਪ ਕਾਂਢੀਆ ਉੱਥੇ ਤੋਂ ਮੁਝਾਇਆ ਹੈ ਸਿਕਰਾਮ ਦਾ ਉਹ ਰੂਪ ਜਿਹਾ ਵੇਛੇ ਡੋਕਦਾ ਮਨਾ ਜਿਹੜਾ ਰੂਪ ਉੱਥੇ ਸੀ ਨਾ ਇਹ ਤਾਂ ਸਾਡੇ ਤੋਂ ਉੱਥੇ ਗੱਲ ਕੀਤੀ ਸੀ ਸਬਰ ਦਾ ਸ਼ਾਸਤਰ ਜੇ ਇੱਥੇ ਆ ਕੇ ਉਹੀ ਡੋ ਸੱਜਣ ਨੂੰ ਝੂਠ ਬੋਲ ਬੜਾ ਪਰਤਿਆ ਦਾ ਰੂਪ ਦੇਖਦੇ ਨੇ ਗੱਲ ਉਸ ਵਦ ਦੀ ਹੈ ਉਸ ਵੇਲੇ ਬਰੁਧਾ ਜਦ ਉਸ ਪੱਤੇ ਬਰੁਧਾ ਹੈ ਸਾਡੀ ਬਲੌਸਟੀ ਫਿਰ ਉਹਦੇ ਆਲਾ ਰੂਪ ਤੁਸੀਂ ਇੱਥੇ ਕਿਵੇਂ ਦੇ ਦੋ ਮਹਿਰਾਨੂ ਤੱਕ ਨਹੀਂ ਜਦੋਂ ਬਿਟਾ ਜੂਗਾ ਇਹ ਤਾਂ ਘਰੂਤੀ ਨੂੰ ਪੂਰੇ ਡਟਾ ਲਾਉਣਾ ਜਿਹੜਾ ਪਹਿਲੇ ਚੈਟਰ ਤੇ ਡਟਾ ਲਾਉਂਦੇ ਪਿਛਲੇ ਜਿੱਦਾਂ ਇਹਦਾ ਤੇਰੇ ਡਾਣੂਸ ਤੇ ਪੂਰੇ ਲਾ ਦੋ ਉਹ ਕਹਿੰਦੇ ਥਲੇ ਲੱਗ ਨਹੀਂ ਕਹਿੰਦੇ ਪਹਿਲੇ ਡਾਣੇ ਜਿ ਲੋਣੇ ਉਹ ਹੋਏ ਬਰੇ ਨਹੀਂ ਸਦੀਨ ਸੁਵਾਲ ਕਥਾ ਜਿਹੜੀ ਦਸਮ ਬਾਚ ਚ ਚੱਲਦੀ ਆ ਉਹ ਤੇ ਕਈ ਕਰਾਉਂਦੇ ਸਦੀਨ ਸੁਵਾਲ ਹਾਂ ਜੇ ਇੱਛੇ ਤੁਸੀਂ ਉਹੀ ਅਪਲਾਈ ਹੋਊਗਾ ਉੱਥੇ ਉਹੀ ਅਪਲਾਈ ਹੋਊ ਸਾਡੇ ਕੋਲ ਸਾਡੇ ਕੋਲ ਉਹੀ ਅਪਲਾਈ ਹੋਣੀ ਹੂੰ ਮੈਂ ਤਾਂ ਕਿਤੇ ਦੇ ਤੇ ਆ ਰਿਹਾ ਬੈਠਾਉਂਦੀ ਫਿਰ ਆ ਵੀ ਹਰਮਨ ਤੋਂ ਕਿਉਂ ਗਿਆ ਲਖਮਣ ਕਿਉਂ ਗਿਆ 106 ਹੈ ਨਹੀਂ ਕਿਤੇ ਨਾ ਇਹਦਾ ਅਮਰ ਫਰਕ ਆ ਗੋ ਜਾਲ ਆਇਆ ਨਾ ਤੇ ਲਖਮਣ ਆ ਜੂਗਾ ਹੱਥੀ ਦੀ ਹੱਥੀ ਵੀ ਖੜਾ ਲਖ ਅਲੱਗਾ ਬਣਾਣਾ ਲੱਗਾ ਫਿਰ ਉਹ ਤੇ ਇਹ ਭੋਜਨ ਅਨਸਵਾਰ ਪਰ ਤੇਰਾ ਉਹ ਸੁਣਾ ਤੇ ਬਿਠਿਆ ਉਹ ਜਨ ਅੰਸਵਾਰ ਹੋਂ ਦੀ ਜਿਹੜੀ ਰਸ ਲੈਣ ਵਾਲੀ ਸ਼ਕਤੀ ਹੈ ਉਹ ਜਿਹੜੀ ਸਾਡੇ ਅੰਦਰ ਹੈ ਮਾਇਆ ਦੇ ਉਹ ਜਦ ਅੰਦਰ ਉਹ ਹੈ ਉਹ ਵੀ ਜੇ ਅੰਦਰ ਕੋ ਹੋ ਜਾਂਦੇ ਦੂਏ ਰਸਾ ਦੇ ਵਿੱਚ ਫਰਕ ਦਾ ਪਤਾ ਫਿਰ ਜੀਤੇ ਜੇ ਤਾਂ ਜੇ ਤਾਂ ਸੱਚ ਦਾ ਰਾਹ ਸਭ ਝੂਠ ਦੇ ਰਾਹ ਦੇ ਵਿੱਚ ਫਰਕ ਰੱਖ ਕੇ ਇਹ ਉਹਦਾ ਅੰਦਰ ਅੰਦਰ ਅਰਥ ਹੈ ਅੰਦਰ ਤੋਂ ਹੋਰ ਹੋਰ ਹੋਰ ਭੋਜਨ ਅਨੁਸਵਾਦ ਅੰਤਿਅ ਸਵਾਦ ਸੰਦੇਸ਼ ਵਿਚਿਆ ਚਰਨ ਮੰਨ ਤੇ ਬਨ ਹੋਰ ਵੀ ਤਾਂ ਬਹੁਤ ਕੁਸਾ ਦੁੱਧ ਵੀ ਆ ਫਲ ਵੀ ਹਾਂਜੀ ਵਿਚਿਆ ਚਰਨ ਪਰ ਵਿਗਾਰ ਕੋ ਤਾਵੇਂ ਵਿਚਿਆ ਚਰਨ ਪਰ ਵਿਗਾਰ ਕੋ ਤਾਵੇਂ ਬਿੱਤੇ ਜਾਵਲ ਨੇ ਵਿਚਿਆ ਚਰਨ ਪਰ ਵਿਗਾਰ ਕੋ ਇਹ ਅਵਾਂਚਿਤ ਕਰਕੇ ਪਰ ਵਿਗਾਰ ਕੋ ਤਾਭਣ ਕੋਈ ਇਹ ਵੀ ਪਰ ਕੀ ਪਰੇਤ ਕਦੋਂ ਆਉਂਦਾ ਨਹੀਂ ਚਰਨ ਪਕਾਰ ਕੋ ਤਾਂ ਹੈ ਪਰ ਪੰਦਕਾਰ ਆ ਗਿਆ ਜਿਹਦੇ ਚਰਨ ਪਾਰ ਪੰਦਕਾਰ ਕੋ ਤਾਂ ਹੈ ਨੇ ਅਸਲ ਦੇ ਵਿੱਚ ਪੁਕਾਰੇ ਦੇ ਆਪਣੇ ਦਾ ਹੈ ਸੱਚ ਦੀ ਸਭਾ ਸਭਿਠਾ ਇਹ ਕਿਰਤਨ ਬਿਠਾਵਾ ਜੀ ਬਕਾਰਲੇ ਆਪਣੇ ਨਹੀਂ ਹੈ ਤੇ ਬਕਾਰ ਬਗਾਨੇ ਨੇ ਬਗਾਨੇ ਨੇ ਅਡੋਟ ਗਰੀਬਾਂ ਦਾ ਅਲੱਗ ਗੱਲ ਹੈ ਦੂਜੇ ਦਾੰਬਿਧਾਰੇ ਆਪਣੇ ਦੀ ਸੀ ਏਡੀ ਉਹ ਬਕਾਰੀ ਥੀਓ ਜੀ ਜਦੋਂ ਲਾਇਕ ਨਹੀਂ ਆਇਆ ਹੈ ਦਰਵਾਜ਼ੇ ਬਕਾਰ ਕਿਸੇ ਦੇ ਲੈ ਰਿਹਾ ਹੈ ਸਾਕਤ ਤੋਂ ਲੈ ਰਿਹਾ ਬਕਾੜੇ ਸਰਵਕਾਸ ਮਤ ਸਾਕਤ ਦੀ ਲੈ ਰਿਹਾ ਉਸੇ ਆਈ ਇਸਤਰੀਆਂ ਦੀ ਦਮ ਜਲ ਰਹੀ ਸਾਰੀ ਸਾਰੀਆਂ ਬੁੱਕੀਏ ਉੱਥੇ ਜਲ ਰਹੀ ਭਈ ਜਿਆਦੇ ਬਾਲ ਹੁੰਦੇ ਸੀ ਬਾਲ ਤੋਂ ਕੋਈ ਬਕਾੜੀ ਨਹੀਂ ਸਤੋ ਹੀ ਲੈ ਰਿਹਾ ਬਕਾੜੀ ਸੰਸਾ ਤੋਂ ਹੀ ਲੈ ਰਿਹਾ ਬਕਾੜੀ ਸਭ ਕਾ ਲੈ ਰਿਹਾ ਜੋ ਦੇਖਿਆ ਇਹ ਤਾਂ ਲਹਾਲਾਣਾ ਸੀ पकड़े जब लाग गया हद तो ये था गले में सिखया लेया लाग गया फिर पुकार अपने को पर पुकारे वो नो क्रिएट जीता है सर नो क्रिएट जीता है तुम सागत सागत की बणदा प्रकार बणदा सारे ਜਦੋਂ ਵੰਡਦਾ ਲੋਕਾਂ ਵਾਸਤੇ ਦਾ ਪਰਵਕਾਣੇ ਲੋ ਪਰਪਕਾਣ ਦੀ ਵਜਾ ਹੈ ਪਰ ਵਿਕਾਣੇ ਵਿਕਾਣ ਉਹ ਪਰਵਕਾਣ ਨੂੰ ਤਾਂ ਹੁੰਦਾ ਪਰ ਉਹ ਬਗਾਵਤ ਹੁੜੀ ਤੁਗਾ ਪਰ ਵਿਕਾਣ ਬਾਦ ਤੂੰ ਤਾਂ ਲਾਤੀ ਦੁਨੀਆ ਭਜਣ ਲਾਤੀ ਸਾਰੀ ਹੈ ਲੋਦੇ ਪਰਵਕਾਣ ਦੀ ਥਾਂ ਤੇ ਸਿੱਧੀ ਬੁਲਵਸਾ ਸਾਰੇ ਅਟਕੂ ਪਰੇ ਜਾਂਦੇ ਨਹੀਂ ਲੋਟਾ ਇਸ ਤਰ੍ਹਾਂ ਹੋ ਜਾਂਦਾ ਸਾਲ ਸਾਲ ਵਜਨ ਪਰਵਾਰ ਨਾਲ ਨਤੀਜਾ ਦੇ ਰਿਹਾ ਹੈ ਜਿਹੜੇ ਉਹਨਾਂ ਕੋਲ ਸਾਰੇ ਹੋ ਜੀ ਲੋਕ ਭੱਜੇ ਨੇ ਲੋਕੀ ਆਈ ਜਿੱਥੇ ਆ ਮੰਨ ਪਰ ਲੋਕ ਨਿਭਾਵੇ ਪਰ ਲੋਬ ਪਰ ਲੋਬ ਨਿਭਾਵਾ ਜੇਰਾ ਪਰ ਤੈਨੂੰ ਦੂਜਾ ਆਦਮੀ ਜੇ ਕੋਤੇ ਨੂੰ ਗੁੱਸੇ ਗੱਲ ਦਿਖਾ ਦੇ ਤਾਂ ਮਰ ਹੀ ਲੇ ਰੋਕੀ ਲਾ ਗਏ ਗੁਪਤ ਉਹ ਕੰਨਾਏ ਤੋਂ ਪਰਵਾ ਉਹ ਰੋਜ਼ਾ ਹੈ ਤਾਂ ਆਸ ਸੁੱਖ ਪੂਰੀ ਹੁੰਦੀ ਹੈ ਤਾਂ ਆਸ ਸੁੱਖ ਪੂਰੀ ਹੋ ਗਿਆ ਨਹੀਂ ਹੋ ਕਰਤਾ ਆ ਲੋਭ ਜਿਹੜੇ ਲਵਾ ਰਹੇ ਨੇ ਜੀ ਜਿਹੜਾ ਬਿਠਿਆ ਹੈ ਤਾਂ ਦਾਰੀਸ਼ਾ ਇਹਦਾ ਕੋਈ ਨਹੀਂ ਤਾਂ ਕਰੇ ਆ ਜਿਹਦੇ ਸਤਿ ਕਿਸ਼ਾ ਕਰਦਾ ਮਰਬਾਨੀ ਲੋਭ ਹੈ ਜੀ ਜਿਹੜੇ ਲੋਭ ਕੀ ਤੁਹਾਨੂੰ ਦੇ ਰਹੇ ਜੀ ਮਤਲਬ ਵੈਦੇ ਕਹ ਰਹੇ ਨੇ ਲੋਕ ਦੇ ਐਸਾ ਕੁਝ ਹੈ ਨਹੀਂ ਹੈ ਬਿੱਛਾ ਅਸਦੁੱਲਾ ਹੋ ਲੋਕਲ ਬਾਈਬਲ ਕਹ ਰਹੇ ਅਜੇ ਵੀ ਵੋਟਾਂ ਨਹੀਂ ਕਰਦੇ ਐ ਕਰਦਾ ਗਿਆ ਕਹਿੰਦੇ ਵੋਟਾਂ ਵਾਹੂ ਦੇਖ ਲਾਂਗੇ ਵੀ ਇਹ ਇਹਨਾਂ ਚਲ ਸਾਰੇ ਜਲਦੇ ਹੀ ਲੋਕਾਂ ਘੁੱਦਦੇ ਹੀ ਤਨ ਨਹੀਂ ਪਰ ਵਿਚਿਆ ਤੁੰ। ਸਿੱਤੇ ਪਰਪਕਾਰ ਨਹੀਂ ਲੋਹਾ। ਅੱਛਾ ਹੀ ਲੋਹਾ। ਉਤਾਲੇ ਵਿੱਚ ਹੈ ਆਉਂਦੇ। ਵਿਚਿਆ ਤਾਂ ਨਹੀਂ ਪਰ ਮੂਹ ਪਰ ਨਹੀਂ। ਪਰਕਤਾ ਜਿਤੇ ਹੈ ਨਹੀਂ ਤਾਂ ਸੇ ਵਿੱਚ ਹੈਦੇ। ਵਿਚੇ ਹੀ ਆਵੇ। ਸਭ ਬਾਸ ਲੈਤ ਬਕਾਰਾ। ਉੱਥੇ ਹੀ ਬਕਾਰਾ ਦੀ ਲਊਗਾ ਹੋਰ ਕੀ ਹੈ। ਉਹੋ ਤਾਂ ਜਿੱਤੇ ਵਕਾਰ ਹੈਗੇ ਨੇ ਉਸੀ ਵਜੋਂ ਉੱਥੇ ਨੂੰ ਵੀ ਵਜਣਾ ਹੋਊ ਵੀ ਵਕਾਰਾਂ ਦੇ ਜੇ ਵਕਾਰ ਹੈਗੇ ਤਾਂ ਵਜਣਾ ਹੋਣੀ ਹੀ ਉੱਥਾ ਇਹ ਵਕਾਰਾਂ ਦੀ ਵਾਸ਼ਨਾ ਵਾਸਤੇ ਉੱਥੇ ਵਕਾਰ ਰੱਖੇ ਤੇ ਵਾਸ਼ਨਾ ਹੋਣੀ ਚੀਜ਼ ਹੈ ਵਕਾਰ ਹੋਣੀ ਉੱਥੇ ਜਾਂ ਚੰਤਰ ਪਰ ਆ ਲੱਗਦਾ ਮੁਸੀ ਜੰਤਰ ਤਾਂ ਫਰੇ ਰਹਿੰਦੀ ਹੈ ਸੱਚ ਜੰਤਰ ਇਹ ਸੋਤੇ ਦੀ ਵਕਰੀ ਇਹਨੇ ਛੱਡਿਆ ਵਕਾਰ ਨੂੰ ਰੱਖਦੇ ਸੀ ਅਦਭੁਤੀ ਗੀਤ ਨਹੀਂ ਲੱਭੀ ਕਿਹੜਾ ਚੰਤਾਂ ਸਿਖਾਉਂ ਦਰੇ ਦੇ ਉਹ ਬੋਲੇ ਤੇ ਕਹਦੇ ਉਹ ਨਾ ਕਿ ਕਸੂਰੀ ਸੀ ਜਿਹੜੀ ਉਹਦੇ ਤਾਂ ਹਿੱਲਬੇੜੀ ਰਹਿ ਗਵੜੀ ਇਦਰੀ ਰਹਿਤ ਥੂੜੀ ਗੱਤ ਅਸਰ ਤਾਂ ਇਹ ਸੁਬਾਨ ਸਿੱਖੀ ਬਚਪਨ ਤੋਂ ਵਿਚ ਸੀ ਜਿਆਦਾ ਜੰਮਿਆਂ ਜਾਂ ਸੁਪਨ ਸੀ ਇਹਦੇ ਉੱਤੇ ਅਕਸੀ ਉਹਦੇ ਦਾ ਚੱਡੀ ਮੋਟੀ ਕਾਇਦ ਹਾਲ ਸੀ ਜਿੱਦਦੇ ਆ ਜਿਹੜੀ ਸਖਿਆ ਬੰਵਾਉਣੀ ਹੈ ਜੀ ਉਹ ਕਦੋਂ ਚਲੂ ਸਖਿਆ ਬੰਵਾਉਣੀ ਹੈ ਇੱਕ ਥੋੜੀ ਵਾਲੇ ਗਾਦ ਥੰਦੇ ਕਰ ਚਾਹ ਦੇਣ ਦਤ ਜੀ ਮਾਥੀ ਚੰਦਰ ਪੜਾ ਤੇ ਬੰਦ ਕਰ ਹਾਂਜੀ ਬੇਨੂ ਜੀ ਆਪਾਂ ਤੇ ਬਾਬੇ ਨਾਲ ਆ ਰਹੇ ਹਰੇ ਆਏ ਜੀ ਕਦੀ ਪੰਜੀ ਬੱਬੇ ਵਾਲੇ ਦਾ ਦੁਕਾਨ ਦੁਕਾਨ ਬੱਬੇ ਦਾ ਜੀ ਹਾਂ ਆਪਾਂ ਨਾਲ ਬੱਬੇ ਨਾਲ ਇਹੋ ਗੁਰ ਨਾਨਦ ਗੁਰ ਨਾਨਦ ਬਾਹਰ ਬੰਦੇ ਆਦੇ ਪ੍ਰਭਾਪ ਕੋਈ ਇਹ ਇਹ ਇਹ ਜਿਹੜੇ ਆਇਆਂ ਨਾ ਉਹ ਵੀ ਨਾਲ ਦੀ ਇਹ ਬਿਕਾਰ ਕਨੀ ਹੋ ਬੱਬੇ ਨਾਲੇ ਨਾ ਬੱਬੇ ਉਹ ਪੰਜਾਬੀ ਕੋਈ ਹਿੰਦੀ ਦੇ ਬੱਬਾ ਹੈ ਰਵਾਲਾ ਹੈ ਕੋਈ ਇਹਾ ਆਪਣੇ ਵੀ ਬਾਬਾ ਹੀ ਕਰਦਾ ਹੈ ਵਿਚਾਰ ਨੂੰ ਤੇਰੇ ਨਾਲ ਕਰਨਾ ਸਹੀ ਜਿਵੇਂ ਦੇਖ ਆਲ ਦੇ ਕੰਮ ਕਰੇ ਵੇਖ ਆਲ ਦੇ ਕੰਮ ਅਹੰਕਾਰ ਤੇ ਇਹ ਰਿਹਾਰਗੇ ਬੇਤਾਰ ਜੇ ਹੈ ਜੋ ਆਪਣਾ ਰੱਖਣ ਕੱਲ ਉੱਥੇ ਚਲੀ ਜਾਣੀਏ ਉਹ ਠੀਕ ਹੈ ਜੇਲਾ ਕੰਮ ਕਰਦਾ ਤੇ ਇਲਾਹ ਹੋ ਜਾਣਾ ਜੋ ਨਹੀਂ ਕਰਦਾ ਕਬ ਆਇਆ ਤੇ ਜਿੱਤੇ ਵੀ ਕਾਰਜ ਰੋੜ ਕਰਦਾ ਕਾਰਜ ਇੱਕ ਹੈ ਇੱਕ ਕਾਰਜ ਨਹੀਂ ਸਰੀਆ ਇਹਦਾ ਕਾਰਜ ਇੱਕ ਹੀ ਹੈ ਦਾ ਬਾਕੀ ਦੁਨੀਆਂ ਦੇ ਜਿੱਤੇ ਕਾਰਜ ਵੀ ਬਹੁਤੇ ਇੱਕ ਕਾਰਜ ਤੇ ਬੇਕਾਰ ਨੇ ਬਸ ਔਰ ਕਾਲਾ ਜੈ ਬਕਾਰ ਕਹ ਲੈ ਕੋਈ ਚਲਾ ਜੋ ਮਰਦੀ ਚਲੇ ਜੇ ਬੇਕਾਰ ਕਹ ਲੈ ਤਾਂ ਸਭ ਕੋਈ ਹਲਾ ਔਰ ਕਾਰ ਕਹ ਲੈ ਤਾਂ ਆਇਆ ਜਿਹੜੇ ਮਾਇਆ ਜਸ ਦੇਖ ਹੈ ਨੀ ਜ਼ندگی ਅਪੇਖਿਆ ਕਰਦੀ ਤਾਂ ਕਿਆ ਮਾਇਆ ਸਮਾ ਉਹ ਚਲੀ ਕਰਦੀ ਵਾਲੇ ਕੋਈ ਹੈ ਕੋਈ ਵਰਤ ਨਹੀਂ ਹੈ ਭਾਵਨਾ ਨਹੀਂ ਕੋਈ ਵਰਤ ਨਹੀਂ ਲਫਜ਼ਾਂ ਦੇ ਵਰਤ ਹੋ ਜਾਂਦਾ ਅਸਲੀ ਭਾਵ ਅਰਥ ਲੈਣ ਦੇ ਅਖਰੀ ਅਰਥ ਅਖਰੀ ਆਪੀ ਭਾਵ ਦੋਹਾਂ ਦੇ ਭਾਵ ਅਰਥ ਕੋਈ ਨਿਕਲ ਨਹੀਂ ਦੋਹਾਂ ਦਾ ਇੱਕੋ ਉਹ ਅਖਰੀ ਅਰਥ ਨਹੀਂ ਨਿਕਲਦਾ ਜੇ ਤੁਹਾਡਾ ਅਖਰੀ ਅਰਥ ਸਹੀ ਹੈ ਤਾਂ ਭਾਵ ਅਰਥ ਵੀ ਦੂਰੀ ਤੇ ਭਾਵ ਅਰਥੇ ਅਰਥ ਨਹੀਂ ਹੋ ਸਕਦਾ ਅਖੰਡ ਦੇ ਵਿੱਚ ਤੁਸੀਂ ਦੋ ਹੱਥੀ ਕਰ ਸਕਦੇ ਪਰ ਪਾਵਾਰ ਤੱਕ ਦਿੱਕਤ ਹੋਣੀ ਚਾਹੀਦੀ ਜੇ ਪਾਵਾਰ ਤੱਕ ਤੁਹਾਡਾ ਆਖਰੀ ਹੱਥ ਤੇ ਗੜਬੜ ਹੋ ਜੂਗੀ ਉਹ ਤੁਹਾਡਾ ਧਾਤੂ ਹੋ ਜਾਣਾ ਬੇਕਾਰੇ ਹੋ ਗਏ ਕਿ ਜਦੋਂ ਅਮਰਗੋ ਪ੍ਰੋਕਾਂ ਦੇ ਮੇਲੇ ਲੱਗਦਾ ਜਦੋਂ ਬੱਚੇ ਨੂੰ ਸਿਆਹੀ ਲੱਗਦੀ ਹੈ ਉਹ ਲੱਗਦਾ ਅਸਪੈਕਟਿਵ ਕਰ ਦੋ ਇਹ ਦਿਖੋ ਠੀਕ ਹੈ ਜੀ ਇਹ ਡਾਕਟਰ ਕਰਦਾ ਤੇ ਕਾਰ ਨੂੰ ਬਿਕਾਰ ਕਰਦਾ ਮੇਰੇ ਕਾਰ ਕਮਾਵੇ ਹੈ ਨਾ ਜੋ ਕਾਰ ਸੀ ਉਹ ਬਿਕਾਰ ਹੋ ਗਈ ਕਾਰ ਕੀ ਹੈ ਆਰਾ ਹੁਕਮ ਜਰਨ ਉਹ ਕੁਬਿਤੇ ਰਾਕੇ ਕਾਰ ਕਰਦੀ ਇਹ ਕਾਲ ਦੇ ਡਾਇਰ ਜਰਨ ਕਾਰ ਦਾ ਲੈਕਚਰ ਜੋ ਹੋਇਆ ਬੇਕਾਰ ਬਿਕਾਰ ਹੁੰਦਾ ਆਪਣੀ ਬਰਤੀ ਤੇ ਜੇ ਕਦਰ ਨਾ ਨਾ ਕੀਤਾ ਮੇਰੇ ਅਕਲ ਸ਼ਰਮਣੀ ਆਇਆ ਕੋਈ ਬੇਕਾਰ ਲਾਉਂਦਾ ਤੇ ਆਇਆ ਉਹ ਠੀਕ ਬੇਕਾਰ ਗੁੰਬੇ ਨਾ ਨਾ ਪੰਚ ਲਿਆਇਆ ਮੇਰਾ ਆਇਆ ਆਪਣਾ ਆਪਣਾ ਬਿਕਾਰ ਡਰ ਜਾਣ ਮੈਂ ਜਿਹੜੇ ਕਬਟ ਹੋਵੇ ਉਹਨੂੰ ਬਿਨ ਬੁਰਜੇ ਵਿੱਚ ਆ ਸਭ ਸਭਨ ਦੇ ਨਾਨਕ ਹਰ ਹਾਲ ਨਾਮ ਲੈ ਬਿਨ ਬੁਝੇ ਵਿਚਾ ਸਪੈ ਜੇ ਦੇ ਵਿੱਚ ਕੋਈ ਬੁਝਿਆ ਦੀ ਅਸੀਂ ਸਾਰੇ ਸਭ ਕੁਝ ਬੁਝੇ ਬਿਨ ਬੁਝੇ ਜੇ ਜਿੰਨਾ ਵੀ ਅਸੀਂ ਕੁਝ ਕਰ ਰਹੇ ਹਾਂ ਹੋਰ ਦੁਨੀਆਂ ਦੇ ਵਿੱਚ ਸਾਰੇ ਜੀਵ ਇਹੋ ਦੇ ਵਿੱਚ ਕੋਈ ਬੁਝਾ ਅਸੀਂ ਆਪਣਾ ਅਸਲੀ ਗੱਲ ਨਹੀਂ ਗੱਲ ਹਰ ਕੀ ਕਹਾਣੀ ਬੁਝੀ ਆਪਣਾ ਜਿਹੜਾ ਸਰੂਪ ਅਸਲੀ ਹੈ ਉਹ ਜਿਸ ਸਰੂਪ ਨਹੀਂ ਬੁਝਿਆ ਤਨ ਵਿੱਚੋਂ ਬੁਰਦੀ ਦੇਖਿਆ ਸੱਚਾ ਝੂਠ ਦਾ ਫਰਕ ਨਹੀਂ ਬੁਝਿਆ ਸੰਸਾਰ ਚੋਂ ਵਿਚਾਰ ਸੱਚਾ ਦਾ ਫਰਕ ਨਹੀਂ ਬੁਝਿਆ ਇਹ ਸੱਚ ਨਹੀਂ ਬੁਝਿਆ ਹੁਣ ਸੱਚ ਹੋਏਗਾ ਸੱਚੀ ਦੱਸਿਆ ਦੇ ਮੁਝੇ ਮਥਿਆ ਸਭ ਕੋ ਸਭ ਦੇ 4000 ਨਾਮ ਲੈ ਜਿਹੜਾ ਸੱਚ ਬੁਝੂ ਉਹ ਸੱਚ ਹੈ ਬਾਕੀ ਸਭ ਮਥਿਆ ਵੀ ਆਏ ਕੰਮ ਜਿਹੜੇ ਗਏ ਨੇ ਉਹ ਸਾਰੇ ਵਿੱਚ ਹੀ ਜਿਹਦੇ ਵਿੱਚ ਤੁਸੀਂ ਹੋ ਜਣੀ ਬੁਝਾਰਤ ਹੈ ਕਾ ਬੁਝਾਰਤ ਬੁਝੇ ਆ ਲੈ ਉਹ ਤੁਸੀਂ ਉਹਨੂੰ ਵਿੱਚ ਰਹਿਣ ਕੇ ਰੱਖ ਕੇ ਗੱਲ ਕਰੋ ਜ਼ਰੂਰੀ ਡੀਓ ਦੀ ਐਕਸਪਲੇਨੇਸ਼ਨ ਜੀ ਹੋ ਗਈ ਮੁਝੇ ਲੱਗਦਾ ਆ ਗਿਆ ਅੱਛਾ ਬਨਬੂਜੇ ਜੀ ਮੁਝੇ ਬੁਝਾਓ ਬੁਝਾਓ ਬੁਝਾਓ ਜੀ ਐਕਸਪਲੇਨੇਸ਼ਨ ਜੀ ਰਹਿ ਗਈ ਜੇ ਨਹੀਂ ਹੋ ਸਕੀ ਜੀ ਬੁਝਾ ਲਈ ਗਏ ਐਕਸਪਲੇਨੇਸ਼ਨ ਵਿਚਵੀਂ ਜੀ ਗੱਲ ਰਹਿ ਗਈ ਕਿਉਂਕਿ ਜੋ ਨਾਲੇ ਗੱਲ ਜਨਾ ਵਰਗੀ ਸੁੱਤਨ ਗੱਲਾ ਉੱਥੇ ਜੋ ਉਹ ਵੀ ਨਾ ਕਹਿੰਦੇ ਉਹ ਤਾਂ ਫੇਰ ਕਰਦੇ ਆ ਹੀ ਰਹੇ ਆ ਆ ਗਈ ਅਸੀਂ ਆ ਬੁਝਾਤਾ ਹੈ ਸਭ ਕੁਝ ਨਕਸਰਾ ਸੁਣਿਆ ਹੋਇਆ ਵੀ ਮਿਠੇਲ ਜੋਨਾਂ ਚੁ ਜੁਜਾ ਤਾਂ ਹੈ ਕਿ ਕੋਈ ਨਾ ਨਹੀਂ ਚੇ ਜੀ ਜੀ ਨਾ ਸਭ ਇਹਨੂੰ ਬੁਝੇ ਮਿੱਥਿਆ ਸਭ ਹੈ ਸਭ ਦੇ ਨਾਨਕ ਹਰ ਹਰ ਨਾਮ ਲੈ ਸਫਲ ਦੇ ਸਫਲ ਕਾ ਰੋਣ ਫੜ ਲੱਗੇ ਜਾਂਦੋਂ ਅਸਰੇ ਫੜ ਲੱਗੇ ਚਲੇ ਗਿਆਨ ਫਲ ਇੱਕ ਪੱਕਾ ਫਲ ਜ਼ਰੂਰ ਦੇ ਦੇ ਕਰ ਦੇ ਕੋਈ ਸ਼ਬਦ ਹੋਵੇਗਾ ਇੱਕ ਫਲ ਸਿਰਫ ਇੱਕ ਸ਼ਬਦ ਇਤੇ ਦੇ ਸ਼ਬਦ ਹੈ ਕੋਪਤਾ ਕੋਈ ਬੜਾ ਯਾਲਪੁਰ ਉਹਨ ਡਾਇਆ ਬਹੁਤ ਅੰਸੋ ਬਲੋ ਸੁਫਲ ਫਲਾ ਸੁਖਨ ਫਲੋ ਕਹਿੰਦੇ ਨੇ ਇੱਕ ਫਲ ਦੀ ਪ੍ਰਾਪਤੀ ਕਰਵਾ ਦੇਣਾ ਕਿਉਂਕਿ ਇਹ ਰੁੱਖ ਹੈ ਜਾਣ ਤੋਂ ਬੁਰਸਤੋ ਰੁੱਖ ਤਾਲ ਮੁਫਲ ਫਲ ਕਾ ਗਿਆਨਤਾ ਫਲ ਕਿ ਕਦੀ ਲੱਗ ਗਿਆ ਨੂੰ ਫੇਰ ਸਭਾ ਦਾ ਸਭਾ ਦਾ ਸਮਝੇ ਫਲ ਲੱਗੂਗਾ ਪਹਿਲਾਂ ਨਾਮ ਲੈਣਾ ਹੀ ਪਊਗਾ ਸਤੋਵ ਹੋਊਗਾ ਫੇਰ ਜਪੂਗਾ ਫੇਰ ਫਲ ਲੱਗੂਗਾ ਤੰਗ ਦੇ ਸਭਨੂੰ ਸਭ ਤੋਂ ਦੇ ਨਾ ਲਈ ਦੇ ਹੀ ਬਲ ਕੇ ਹੋਊਗਾ ਲੋਕ ਦੇ ਹੀ ਐ ਵਿਚਾਰੇ ਨਹੀਂ ਦੇ ਨੁਕਤੇ ਸਫਲਤਾ ਦੇ ਇਹ ਦੇ ਹੈ ਬਾਹ ਦੀ ਦੇ ਹੀ ਚਾਇਦੇ ਬਣਾ ਹੋਈ ਨਹੀਂ ਸਕਦਾ ਨਾ ਵੀ ਤਾਂ ਉਹ ਲੱਭਦਾ ਦੇਹੀ ਦੇ ਦਾ ਦੇ ਹੈ ਉਹ ਦੀ ਦੇਹੀ ਲੱਭੇ ਦੇ ਦੇ ਜੀ ਸੱਚ ਆ ਗਿਆ ਤੇ ਦੇਹ ਦੀ ਸੱਚ ਆ ਗਿਆ ਇਹ ਤੇ ਗਲਤੀ ਹੋਈ ਹੋਈ ਹੈ ਇਹ ਨੂੰ ਸਹੀ ਕਿਹਾ ਵੀ ਗਿਆ ਹਾਂ ਸਰ ਸਾਬਲ ਦੇਹੀ ਦੇਹੀ ਹੋਈ ਹੈ ਦੇਹੀ ਗਾਵਾਂ ਵਰਨਾਉਂਦੇ ਦੇਹੀ ਨਾਨਕ ਹਰ ਹਰ ਨਾਮਉਂ ਸਫਲ ਹੋ ਦੀ ਹੈਗੀ ਆ ਜੰਦੇ ਮਾਰਾ ਨਾਮ ਲੈਣ ਦਾ ਉਹ ਸ੍ਰੀਸ਼ਟ ਫਲ ਪ੍ਰਾਪਤ ਹੁੰਦਾ ਜੇਣੀ ਪ੍ਰਾਪਤ ਹੁੰਦਾ ਸੰਭਾਲ ਲੱਗਦਾ ਫਲੂ ਦਾ ਪ੍ਰਾਪਤ ਹੁੰਦਾ ਰਾਮ ਬਾਣੀ ਉਦੋਂ ਦਾ ਪ੍ਰਾਪਤ ਨਾ ਹੁੰਦਾ ਹੁੰਦਾ ਫਲੂ ਲੱਭਾ ਹੁੰਦਾ ਕਿਤੇ ਲੱਗਣ ਦਾ ਪ੍ਰਾਪਤ ਹੋਣਾ ਕਹਿੰਦੇ ਸਫਲ ਸਫਲ ਨਹੀਂ ਜਮ ਵਿੱਚ ਵੀ ਹੁੰਦਾ ਸਫਲ ਹੋ ਜਾਣਾ ਪਰ ਇਹ ਕੰਮ ਨਹੀਂ ਸਫਲਤਾ ਪ੍ਰਾਪਤ ਹੋ ਜਾਂਦਾ ਸਦਾ ਦਿੱਤਾ ਫਰਕਲਾ ਨਹੀਂ ਸਫਲਤਾ ਪ੍ਰਾਪਤ ਹੈ ਜੇ ਲੱਗੇ ਨਾ ਜਿਵੇਂ ਗੱਤੇ ਢੁੱਧ ਦੇ ਬਾਹਰ ਹੀ ਕਦੇ ਨਾ ਆਵੇ ਕੰਮ ਵਾਧਾ ਉਪਰ